ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ਅੰਗ ਸੰਗ ੳਰਜਾਏ ਬਿਸਰਤੇ ਸੁਮਫਿਆ ਫਾਥੇ ਪੰਕ ਮਹਾ ਮਦ ਗੁੰਫਿਆ ਜਿਹੜਾ ਮਨ ਧੰਕਾਰ ਦੇ ਵਿੱਚ ਗੁੰਫਿਆ ਹੋਇਆ ਧੰਕਾਰ ਨਮਸ ਦਾ ਨਸ਼ਾ ਚੜਿਆ ਹੋਇਆ ਹੋਂ ਮੇਰਾ ਉਹਨਾਂ ਸਮਝ ਲੋ ਵੀ ਮਾਇਆ ਮੋਹ ਦੇ ਚੱਕਰ 'ਚ ਫਸਿਆ ਹੈ ਸਰੀਰ 'ਕ ਚੱਕੜਿਆ ਮਾਇਆ ਮੋਹ ਦਾ ਕਿ ਤਸ ਸਰਵਾਂ ਨੇ ਪਹਿਲੇ ਨਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋ ਤਗਲੀ ਚਲੇ ਪੰਕਜ ਵੋਹ ਕਾਕੇ ਪੰਕਜ ਇਹ ਮਾਇਆ ਦਾ ਜਿਹੜਾ ਮੋਹ ਹੈ ਇਹ ਨੂੰ ਸ਼ਰੀਰ ਦਾ ਨਸ਼ਾ ਹੈ ਇਹ ਦੇ ਵਿੱਚ ਪਿਆ ਪਿਆ ਇਹ ਬੇਸੁੱਧ ਹੋਇਆ ਹੋਇਆ ਇਹ ਫਸਿਆ ਹੋਇਆ ਹੈ ਦੇ ਵਿੱਚ ਮਾਇਆ ਵਿੱਚ ਫਸ ਰਹੇ ਹੋ ਮਾਇਆਜ ਫਸਿਆ ਹੋਇਆ ਹੰਕਾਰ ਕਰਕੇ ਮੋਹ ਕਰਕੇ ਅੰਦ ਸੰਗ ਹੋਰ ਜਾਈ ਮਾਇਆ ਦੀ ਸੰਗਤ ਵਿੱਚ ਉੜਿਆ ਹੋਇਆ ਫਸਿਆ ਹੋਇਆ ਇਹ ਬਚਰਤਾ ਸੁਮਫਿਆ ਇਹਨੂੰ ਆਪਣਾ ਜਿਹੜਾ ਮੂਲ ਵਿਸਰਿਆ ਹੋਇਆ ਸੱਚ ਵਿਸਰਿਆ ਹੋਇਆ ਅੱਛਾ ਜੀ ਸੁਮਫਿਆ ਦਾ ਅਰਥ ਕੀ ਹੈ ਜੀ ਸੋਫੀ ਹੁੰਦਾ ਜਿਹਨੂੰ ਨਸ਼ਾ ਨਾ ਹੋਵੇ ਸੋਫੀ ਕਹਿੰਦੇ ਨੇ ਜਿਹੜਾ ਨਸ਼ੇ ਚੋਗਰੇ ਉਹ ਗੁੰਫਿਆ ਆਇਆ ਜਿਹੜਾ ਨਸ਼ੇ ਤੋਂ ਰਹਿਤ ਹੋਵੇ ਉਹ ਸੁਮਫਿਆ ਸੁਮਫਿਆ ਵਿਸਰਿਆ ਆਇਆ ਆਪਣਾ ਮੂਲ ਵਿਸਰਿਆ ਹੋਇਆ ਅੱਛਾ ਜੀ ਮਨ ਨੂੰ ਆਪਣਾ ਮੂਲ ਵਿਸਰਿਆ ਹੋਇਆ ਜੀ ਜਿਹੜਾ ਇਹਦਾ ਮੂੜ ਹੈ ਸਤ ਸ੍ਰੀ ਅਕਾਲ ਬਿਸਰਿਆ ਹੋਇਆ ਮਾਇਆ ਦਾ ਜਿਹੜਾ ਨਸ਼ਾ ਹੈ ਮਾਇਆ ਦੇ ਮੂੜਾ ਨਸ਼ਾ ਚੜਿਆ ਹੋਇਆ ਹੈ ਮਾਇਆ ਖੰਭ ਕਮਲ ਫੁੱਲ ਵਿੱਚ ਉਸ ਸੁਗੰਧੀ ਵਿੱਚ ਮਸਤ ਹੋ ਕੇ ਫਸ ਜਾਂਦੇ ਹਨ ਅਤੇ ਭੌਰਾ ਉਸ ਦੀਆਂ ਖਿੜੀਆਂ ਸੁੰਦਰ ਕਲੀਆਂ ਵਿੱਚ ਆਪਣਾ ਆਪ ਵਿਸਾਰਦਾ ਹੋਇਆ ਸਾਰੇ ਦਾ ਸਾਰਾ ਫਸ ਜਾਂਦਾ ਹੈ ਕੁਛ ਇਸ ਤਰ੍ਹਾਂ ਦੀ ਕਹਾਣੀ ਦੱਸਦੇ ਕੋਈ ਪੌੜਾ ਫਸਿਆ ਦੇਖਿਆ ਇਸ ਬੰਦੇ ਨੇ ਨੇ ਫੁੱਲਾਂ ਤੇ ਬੰਨ੍ਹਦੀਆਂ ਨੇ ਪੌੜੇ ਹੁਣ ਗੁੰਪਿਆ ਇਹਨਾਂ ਨੇ ਫਸਿਆ ਹੋਇਆ ਕਹਿਣਾ ਸੀਗਾ ਹੁਣ ਹੀ ਬਣਾ ਕੇ ਰੱਖਤਾ ਉਹਤੇ ਚਿੱਕੜ ਕਰਕੇ ਕਮਲ ਫੁੱਲ ਬਣਾ ਕੇ ਰੱਖਤਾ ਇਹਨਾਂ ਨੇ ਮਾਇਆ ਬਹੁਤਾ ਚਿੱਤਨ ਛੱਡਤਾ ਜਾਨਵਰਾਂ ਦੇ ਤਾਂ ਪ੍ਰਮਾਣ ਹੁੰਦੇ ਨੇ ਜਾਨਵਰਾਂ ਦਾ ਜਾਨਵਰ ਨੂੰ ਉਪਦੇਸ਼ ਹੈ ਗਾਰੇ ਦਾ ਤਾਂ ਪ੍ਰਮਾਣ ਹੈ ਮਾਇਆ ਮੋਦਰ ਹੈ ਦਾ ਕੋ ਸ਼ਬਦ ਪੰਜਵੇਂ ਪਾਸ਼ਾ ਦਾ ਹੀ ਹੈ ਤੇ ਤਸਰਵੜ ਲਈ ਪਹਿਲੇ ਨਾ ਸਾ ਪਾਣੀ ਤਾਪਕ ਤਨੇ ਕੀਆ ਪੰਕਜ ਹੋ ਉਥੇ ਪੰਕਜ ਲਾਹਦਾ ਪੰਕਜ ਉਥੇ ਫਸ ਗਿਆ ਉਥੇ ਅੱਛਾ ਫਿਰ ਆਪਾਂ ਕੀ ਕਹਿੰਦੇ ਪੰਕਜ ਫਾਥੇ ਪੰਕ ਵੀ ਮਨ ਜਿਹੜਾ ਹੈਗਾ ਇਹ ਮਾਰੇ ਚਿਕੜ ਚ ਫਸ ਗਿਆ ਹੈ ਜੀ ਸਰੀਰ ਚ ਫਸਿਆ ਹੋਇਆ ਇਹਦੇ ਵਿੱਚ ਉਹ ਗਹਾਂਂੀ ਚਲਦਾ ਹੁਣ ਕੋਈ ਇਹ ਪੜ੍ਹ ਕੇ ਆਂਦਾ ਨਹੀਂ ਉਸ ਦਾ ਅੰਦਰ ਮੁਖੀ ਨਹੀਂ ਜਾਂਦਾ ਬਾਹਰ ਮੁਖੀ ਹੋ ਰਹਿਂਦਾ ਹੁਣ ਅੱਛਾ ਮਹਾ ਮਦ ਗੁੰਫਿਆ ਜਿਹੜੀ ਇਹ ਪਿਆ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਲੋੜਾ ਮਾਇਆ ਦੇ ਨੇ ਰਾਸ ਮਾਇਆ ਦੇ ਨੇ ਠੀਕ ਹੈ ਜੀ ਤੇ ਇਹਨੂੰ ਆਪਣਾ ਜਿਹੜਾ ਮੂਲ ਹੈ ਜਿਹੜਾ ਸੂਫੀ ਹੈ ਜਿਹੜਾ ਨਹੀਂ ਮਦ ਚ ਫਸਿਆ ਓ ਬਿਸਰ ਗਏ ਹਨ ਜੀ ਏ ਸੁਮਫਿਆ ਦਾ ਅਰਥ ਕਰਦੇ ਆਂ ਜੀ ਖਿੜੇ ਹੋਏ ਕੀ ਤੋਂ ਸੁਮਫਿਆ ਬਣਿਆ ਨਾਮ ਪਾਇਆ ਤਿੰਨ ਸੂਫੀਆਂ ਹੈ ਤਾਂ ਆਯਾ ਆਇਆ ਸੂਫੀਆਂ ਸ਼ਬਦ ਆਉਂਦਾ ਗੁਰਬਾਣੀ ਚ ਹਾਂ ਉਹ ਗਾਂਠ ਨਾਨਕ ਇੱਕ ਸ੍ਰੀ ਤਰਨਾਥ ਜੇ ਟੂਟੇ ਲੈ ਸਾਠ ਆ ਗਾਂਠ ਜਿਹੜੀ ਹੈ ਆ ਉਹ ਗੁੰਫਿਆ ਤਿਰਗੁੜੀ ਵਜਿਆ ਹੈ ਮਾਇਆ ਫਸਿਆ ਹੋਇਆ ਹੈ ਕੋ ਕੋ ਐਸਾ ਭੀਤ ਕੋਈ ਐਸਾ ਮਿੱਤਰ ਹੈ ਬਾਹਰ ਆਉਣ ਕਹਿੰਦੇ ਨੇ ਵਾਹਲਾ ਮਿੱਤਰ ਆ ਜੋ ਤੇ ਇਹ ਜਿਹੜੀ ਹੈ ਇਹਨੂੰ ਤੋੜੇ ਖੋਲੇ ਸ਼ਰੀਰ ਨਾਲ ਇਹਨੂੰ ਅੱਡ ਗਦੇ ਤਿਰਗੁੜੀ ਤੋਂ ਅੱਡ ਕਰਕੇ ਦਿਖਾਵੇ ਇਹ ਕੋਟਲਗਾਠ ਵਿਖਮਗਾਠ ਹੈ ਜੀ ਅਹ ਉਹ ਤੇ ਕੋਟਲ ਗਿਆ ਠੀਕ ਹੈ ਜੀ ਇਹਨੂੰ ਖੋਲੇ ਹੁਣ ਇਥੋਂ ਮਾਨ ਨੂੰ ਕੱਢੇ ਇਹਦੇ ਚੋਂ ਫਸੇ ਇਹਨੂੰ ਿੱਕੜ ਚੋਂ ਅੱਛਾ ਜੀ ਨਾਨਕ ਇੱਕ ਸ੍ਰੀ ਧਰਨਾਥ ਜੇ ਟੁੱਟੇ ਲੈ ਫਾਂਸ ਇੱਕ ਕਹਨੇ ਹੈਗਾ ਸ੍ਰੀ ਧਰਨਾਥ ਉਹ ਜੇ ਟੁੱਟ ਆਪਣੇ ਮੂਲ ਨਾਲ ਗੱਠ ਵੀ ਲੈਂਦਾ ਅੰਧਾ ਲਈ ਟੁੱਟਿਆ ਆ ਉਹ ਹੀ ਗੱਠੂਗਾ ਹੁਣ ਗੋਪਾਲ ਅੱਛਾ ਜੀ ਇਹਦੇ ਚ ਹਰ ਹਾਂ ਨਹੀਂ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ 366 ਕਹਿੰਦੇ ਸ੍ਰੀ ਧਰ ਹੈਗਾ ਇੱਕ ਉਹ ਕਰ ਸਕਦਾ 10 ਦੱਸ ਦੋ اچھا ਸ੍ਰੀ ਧਰ ਆਪਣਾ ਮੂਲ ਹੈ ਜੀ ਹਾਂ ਮੂਲ ਠੀਕ ਹੈ ਇਹਨਾਂ ਨੂੰ ਫਿਰ ਇਹੀ ਆ ਰਹਿੰਦਾ ਹੈ ਉਹ ਕਹਿੰਦੇ ਨਾਨਕ ਗੁਰੂ ਜੀ ਕਹਿੰਦੇ ਹਨ ਕਿ ਇੱਕ ਅਕਾਲ ਪੁਰਖ ਹੀ ਸਮਰੱਥ ਹੈ ਜਿਹੜਾ ਟੁੱਟੇ ਹੋਏ ਨੂੰ ਆਪਣੇ ਨਾਲ ਮੁੜ ਗੰਢ ਲੈਂਦਾ ਹੈ ਅਜੇ ਤਾਂ ਪਤੰਦਰ ਪ੍ਰਭੂ ਕਹਿੰਦੇ ਕਦੇ ਅਕਾਲ ਪੁਰਖ ਕਹਿੰਦੇ ਨੇ ਕਦੇ ਭਾਈ ਕਦੇ ਕੁਝ ਕਹਿੰਦੇ ਕਦੇ ਪ੍ਰਮਾਤਮਾ ਹੀ ਕਹਿੰਦੇ ਨੇ ਇਹਨੂੰ ਐਡੀ ਬਾਰੇ ਪ੍ਰਮਾਤਮਾ ਕੀ ਹੁੰਦਾ ਵਾਇਗੁਰੂ ਕੀ ਹੁੰਦਾ ਅਕਾਲ ਪੁਰਖਾਡ ਹੁੰਦਾ ਹਾਂ ਜੀ ਬਸ ਆ ਜੀ ਨੇਰੇ ਤੀਰ ਮਾਰਦੇ ਨੇ ਚਾਹੀਦਾ ਥੋੜਾ ਵੱਧ ਗਿਆਨ ਲੈ ਕੇ ਫੇਟੀਕਾ ਲਿਖਣਾ ਚਾਹੀਦਾ ਇਹ ਤਾਂ ਫਿਰ ਜਦ ਆਤੇ ਸਮਾਂ ਲੋਕ ਇਹਨਾਂ ਨੇ ਫਿਰ ਸਾਰਥਕ ਵਿਚਾਰ ਵੀ ਦੇ ਦਿੰਨੇ ਆ ਜੀ ਵਾਏ ਇਸ ਦੇ ਕੀ ਅਕਾਲ ਪੁਰਖ ਆਪਣੀ ਮਿਹਰ ਕਰਕੇ ਜਗਿਆਸੂ ਨੂੰ ਸਵੈ ਸਰੂਪ ਦੀ ਸੋਝੀ ਕਰਾ ਕੇ ਆਪਣੇ ਪ੍ਰੇਮ ਦੇ ਬੰਧਨ ਨਾਲ ਬੰਨ ਲੈਣ ਤਾਂ ਸੰਸਾਰ ਨਾਲੋਂ ਟੁੱਟ ਸਕਦਾ ਇਹ ਸਵੈ ਸਰੂਪ ਵਾਲੀ ਗੱਲ ਵਧੀਆ ਕੀਤੀ ਕਹੋ ਜੀ ਗੱਲ ਸਵੈ ਸਰੂਪ ਵਾਲੀ ਗੱਲ ਤਾਂ ਠੀਕ ਹੈ ਸਵੈ ਸਰੂਪ ਹੀ ਸਤਿਗੁਰ ਹੈ ਇਹ ਅਕਾਲ ਪੁਰਖ ਕਹਿ ਦਿੰਦੇ ਨੇ ਓਏ ਵਿਰੋਧੀ ਗੱਲਾਂ ਕਰੀ ਜਾਂਦੇ ਨੇ ਕਦੇ ਠੀਕ ਕਹਿਣ ਕਦੇ ਗਲਤ ਕਹਿ ਮਤਲਬ ਕਲੀਅਰ ਨਹੀਂ ਕੋਈ ਗੱਲ ਹੈਗੀ ਹਾਂ ਅੰਦਾਜ਼ਾ ਹੀ ਜਿਹੜੇ ਆਪਾਂ 68 ਕਾ ਇਸ਼ਨਾਨ ਕਹਿੰਨੇ ਆ ਉਹ ਆਹੀ 8 ਦੇ ਨਾਲ 60 ਪੈਣ 60 ਪੈਣ ਦੀ ਉਹ ਗੱਲ ਹੈ ਜੀ। 68 ਕਾ ਇਸ਼ਨਾਨ ਇਹੀ ਹੈ। ਆ ਇੱਥੇ 15ਵੇਂ ਸਮਾਪਤੀ ਹੈ।